ਵਿਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਮੈਣੀ ਸੁਖੀ ਮੂਲ ਨਾ ਉਤਰਾ ਪਰ ਜਿਹੜੀ ਹੰਕਾਰ ਆ ਉਹਦੇ ਉਹ ਹੋਰੇ ਫਸ ਲੱਗੀਆਂ ਉਹ ਨੂੰ ਮਹਿਸੂਸ ਨਹੀਂ ਆ ਜਾਂਦਾ ਜਿੰਤਾ ਕਰਨੇ ਆ ਉਹਦੇ ਘਰੀ ਉਹ ਜਿੰਦ ਤਾਰੇ ਰਹੀ ਹਰ ਵਕਤ ਰਹਦੀਆਂ ਨਾ ਹਾਸ ਵੀਦੂ ਅਸਰ ਦੇ ਵਿੱਚ ਕੰਮਕਾਰ ਚ ਵੀ ਹਜ਼ਿਆں ਚ ਵੀ ਖੇੜਿਆਂ ਚ ਵੀ ਕਦੇ-ਤਦੇ ਜੇ ਬਾਹਰੋਂ ਚਿੰਤਾ ਹੁੰਦੀ ਫਿਰ ਉਹ ਵਿੱਚ ਬਣ ਜਾਂਦੀ ਹੈ ਫਿਰ ਮਿਲ ਜਾਂਦੀ ਉਹ ਆ ਕੇ ਉਹ ਚਿੰਤਾ ਦੀ ਹਾਸ ਵੀਦੂ ਸਮਝ ਨਹੀਂ ਲਿਉਦੀ ਚਿੰਤਾ ਕਰਗੀ ਭਜੇ ਫਿਰ ਜਿਹੜਾ ਅਵਨਾਸ਼ੀ ਰਾਜ ਚੱਲਿਆ ਗਿਆ ਨਾ ਇਸ ਅਸਰ ਦੇ ਵਿੱਚ ਉਹਦੀ ਚਿੰਤਾ ਦਾ ਅਸਲੂ ਪਤਾ ਇਹ ਨਹੀਂ ਗਿਆਨ ਦੀ ਜਦ ਗਿਆਨ ਦੀ ਦਾਤਾ ਜੋ ਕੋਈ ਪਤਾ ਲੱਗੇ ਬੁੱਧੀ ਜੋ ਕੋਈ ਪਤਾ ਦਾ ਜਾਨੋ ਚਿੰਤਾ ਮਹਿਸੂਸ ਦੀਆ ਆਖਾ ਤੋਂ ਸਾਡੇ ਚਿਹਰੇ ਤੋਂ ਦਾ ਸਾਨੂੰ ਪਤਾ ਲੱਗਦਾ ਜਿਹੜੀ ਚਿੰਤਾ ਸਾਡੇ ਦਿਮਾਗ ਹੈ ਜਿੱਤੇ ਜਿਹੜੀ ਚਿੰਤਾ ਵੀ ਭੁੱਲੇ ਨਾ ਉਹ ਚਿੰਤਾ ਵੀ ਸਾਡੇ ਹਰ ਵਕਤ ਪ੍ਰਭਾਵ ਸਾਡੇ ਚਿਹਰੇ ਤੇ ਦੀ ਹੁੰਦਾ ਪੈਂਦਾ ਰਹਿੰਦਾ ਜਿਹੜ੍ਹ ਕਰਕੇ ਬੁੱਧੀ ਕਰਕੇ ਸੁਖ ਕੋਈ ਕੇ ਕੋਈ ਨਾ ਕਹਿਣਾ ਭਈ ਉਹ ਤਾਂ ਬਾਰਾਦ ਲਗਿਆ ਜਰਦੀ ਗਲਾ ਕੋਈ ਜਿਹੜੀ ਕਵੀ ਹੋਈ ਕبھی ਹੈਗੀ ਹੈ ਉਹ ਕਵੀ ਦਾ ਪਤਾ ਨਹੀਂ ਠੀਕ ਹੈ ਅਗਲੀ ਕਵੀ ਦਾ ਪਤਾ ਹੈ ਜੀ ਬੁੱਧੀ ਵੀ ਸੁਖਾ ਹੈ ਸੁਖ ਮਹਿਸੂਸ ਕਰਦਾ ਪਰ ਬਹੁਤ ਗਹਿਰੀ ਜਿਦ ਸਾਡੇ ਅੱਲਰੇ ਫਲਾਣੇ ਤੇਲ ਦੇ ਖੂਹ ਨਿਕਲੇ ਆਏ ਹੋਣੇ ਜੂਮੇ ਜਾਉ ਪਏ ਹੋ ਮੁਤਕਬੀਨ ਸਾਨੂੰ ਤਾਂ ਪਤਾ ਕਿਸੇ ਜਾਣਕਾਰ ਦੇ ਲੱਭੇ ਕੋਈ ਜੀ ਦੇ ਲੱਭੇ ਆਹ ਕਰਕੇ ਜਿਹੜੀ ਅੰਦਰਲੀ ਚਿੰਤਾ ਉੱਦਨਲੀ ਚਿੰਤਾ ਹਰੇਕਾਂ ਦੀ ਉਹ ਜਿੰਤਾ ਦਾ ਪਤਾ ਹੋ ਜਾਂਦਾ ਬਾਹਲੀ ਜਿੰਤਾ ਜਿੰਤਾ ਰੇੜੇ ਰੇੜੂ ਬਾਹਲੀ ਜਿੰਤਾ ਤਾਂ ਉਹੀ ਬਣ ਜਾਂਦੀਆਂ ਨੇ ਵੇਵਾਦਲਬਦੀ ਯੋਜਨਾ ਕੋ ਬਣ ਜਾਂਦੀਆਂ ਨੇ ਇਹ ਤਾਂ ਜਿੰਤਾ ਹੀ ਨਹੀਂ ਅਸਲ ਚ ਹੋਇਆ ਸਭ ਤੋਂ ਆਪਣਾ ਸ਼ੀਰ ਆ ਜਾਵੇ ਕਿਸੇ ਦਾ ਇਟਾ ਬੜਾ ਹਾਂਜੀ ਕਿਤੀ ਕੋ ਚੋਟੜੀਆਂ ਦੀ ਜਿੰਤਾ ਕਰੇ ਹੋ ਜਿੱਤੇ ਆਇਆ ਤੋਂ ਕੌਡੀਆਂ ਹਾਰ ਗਿਆ ਇਹ ਕਰਕੇ ਅੰਦਰ ਵਾਲੀ ਚਿਤ ਦਾ ਗਿਆਨ ਗਿਆਨ ਹੁੰਦਾ ਤਾਂ ਉਹਦਾ ਬੁੱਧੀ ਦੇ ਫੈਸਲਾ ਤਾਂ ਸਾਡੂ ਦਾ ਫਿਕਰ ਹੁੰਦਾ ਫਿਰ ਅਬਨਾਸ਼ੀ ਰਾਜ ਵੱਲੋਂ ਸਾਰੇ ਚੱਲ ਕਰਦੇ ਸਾਰੇ ਸਾਡੇ ਜਿਹੜੇ ਯਤਨ ਦੇ ਅਬਨਾਸ਼ੀ ਰਾਜ ਵੱਲੋਂ ਦੇ ਰੋਕ ਕੇ ਸਾਰਿਆਂ ਦੇ ਉਹ ਤਾਂ ਹੈ ਉਹ ਨਹੀਂ ਜਿਹਦਾ ਮੋਤਾਂ ਨਹੀਂ ਹੈ ਉਹ ਭੁੱਲੇ ਹੋਇਆ ਉਹੀ ਬਸ ਸਰੀਆ ਹੋਇਆ ਜਿਹੜੀ ਬਸਪਰਤੀ ਹੋਈ ਉਹ ਇਹ ਉਸੇ ਦੀ ਬਸਪਰਤੀ ਹੋਈ ਹੋਈ ਹਾਂ ਇੱਕ ਜਿਹੜੇ ਰਾਜ ਦੀ ਭੁੱਖ ਆਈ ਵੀ ਰਾਜੇ ਬਣ ਜੀ ਗੜੇ ਹੋ ਜੀ ਇਹ ਹੋ ਉਸੇ ਦੀ ਕੱਲ ਫਰਖਾਵੋਂ ਦਾ ਪਿਆ ਹੋਇਆ ਰਾਜ ਬਣਦਾ ਹੈ ਤਾਂ ਹੈ ਉਹ ਹੈ ਠੀਕ ਹੈ ਮੂਲ ਨਾ ਉਤਰੇ ਕੋਕ ਨਾ ਉਤਰੇ ਇਸ ਕਰਕੇ ਆ ਬਦਾਲਾਂ ਦੀ ਭੁੱਖ ਦੀ ਉੱਤਰੀ ਸਾਡੀ ਉਹ ਬੜਾ ਵੱਣ ਵਾਲ ਨੂੰ ਲੈ ਕੇ ਜਾਂਦੀ ਹੈ ਯਾਨੀ ਅਰਨਾਸ਼ੀ ਰਾਜ ਮਾਲਕ ਫਿਰ ਇਹੀ ਹੈ ਲੋਕ ਨੇ ਮਾਲਕ ਮਾਇਆ ਦੀ ਮਾਲਕ ਹੈ ਫਿਰ ਭੁੱਖ ਹੈ ਜੇ ਦੀ ਭੁੱਖ ਹੈ ਆ ਭੁੱਖ ਹੈ ਉਹ ਭੁੱਖ ਹੈ ਏ ਭੁੱਖਾ ਟੋਕ ਲੱਥਦਾ ਕਿਵੇਂ ਨਾਮ ਤੋਂ ਬਿਨਾ ਕਿਸੇ ਦਾ ਦੁੱਖ ਲੱਥਿਆਈ ਦੀ ਭੁੱਖ ਦਾ ਨਾਮ ਤੇ ਬਿਨਾ ਭੁੱਖਾ ਦੁੱਖ ਕਰ ਲੱਥਦਾ ਫਿਰ ਆਪਣਾ ਜੀ ਰਾਜ ਬੰਦੇ ਗੱਲ ਰਾਜ ਬੰਦੇ ਬੁਵਾ ਰਾਜ ਨਹੀਂ ਕੋਈ ਜੀ ਚਾਰ ਰੋਟੀਆਂ ਖਾਦੀ ਤੇ ਜਾਊਗੀ ਤੇ ਇੱਥਾ ਬਰਾਬਰ ਉੱਡਣ ਆਸਤੋ ਹੋਏ ਤਾਂ ਫਿਰ ਉਹ ਤਾਂ ਕਰਨਾ ਬਈ ਭੁੱਖਦਾ ਹੀ ਘਰਿਆ ਨਾ ਇਕ ਕਨ ਅਨੰਦ ਦਾ ਨੰਦਾ ਕੋ ਖਲਾਗਾਰਾ ਪਟਿਆਲਾ ਕਹਿੰਦਾ ਸੀ ਜੀ ਹਾਂ ਜੀ ਦੋ ਪਰਚਾ ਦੇ ਛਕਲੇ ਸਿੱਕਦਾ ਕਹਿੰਦਾ ਅਨੰਦਾ ਜੀ ਉਹਨੇ ਕਿਹਾ ਉਹ ਵੀ ਨੰਦਾ ਜੀ ਕਹਿੰਦਾ ਉਹਨੂੰ ਦੋ ਹੋਰ ਕਾੜੀ ਦੇ ਜੇ ਉਸਨੇ ਕਿਹਾ ਅਨੰਦਾ ਜੀ ਕੋਈ ਹੋਰ ਪਦਾਰਥ ਹੋਊਗਾ ਦੇਣ ਕੇ ਪਿੱਛੋਂ ਦੇ ਬਾਅਦ ਉਹਨੇ ਆਪਣੀ ਭੁੱਖ ਰੱਖ ਲਈ ਉਹਨੇ ਹੱਥ ਤੋਂ ਹੱਥੇ ਖਾਧੋ ਆਖੀ ਜੀ ਉਠੋ ਜੀ ਉਹਦੇ ਬਾਅਦ ਅਨੰਦਾ ਜੀ ਆਇਆ ਹੀ ਨਹੀਂ ਰੋ ਪੁਰੀ ਦਾ ਵਿਚਾਰੇ ਦੀ ਭੋਖ ਨਹੀਂ ਹੋ ਰਹੀ ਕਿਉਂ ਨਾ ਤਾਂ ਜੀ ਨੇ ਸਮਝੀ ਨਹੀਂ ਸੀ ਨਾ ਜਿਦਾਂ ਸਾਹਿਬ ਜੀ ਕਿਹਨੂੰ ਕਹਿਣ ਦੇ। ਆਏ ਨਾਨਕ ਸੱਚੇ ਨਾਮ ਬਿਨ ਕਿਸੇ ਨ ਬਿਨਾ ਸੱਚੇ ਨਾਮ ਬਿਨਾ। ਬਿਨਾ ਝੂਠੇ ਲਾਂਭ ਹੀ ਨੇ। ਆ ਜਿਹੜੀ ਝਾਕੀਏ ਲਿਖੇ ਹੋਏ ਦੇ ਜੀਵਰੀਆਂ ਨੇ ਕੋਈ ਕੀ ਚਾਹਦੇ ਹੋ ਸਲਕੋ ਕੋਈ ਮੁਬੱਦ ਸਾਹਿਬ ਤੇ ਜੇ ਕਿ ਰਖੋ ਕੋਈ ਖੰਡ ਸਾਕੇ ਗੁਰਨਾਮ ਜੜੀਏ ਪੜੋ ਇਹ ਜਿਹੜੇ ਗਿਆਨ ਨੇ ਨਾ ਮਬਦ ਨਹੀਂ ਆਣੇ ਦੁੱਖ ਤੋਦੇ ਨੇ ਜਤੂਗਾ ਇਹਦੇ ਨਾਲ ਕੇ ਜਿਦਾ ਮਹੱਲਾ ਪੰਜਵਾਂ ਮੁਠੜੇ ਸੇਈ ਸਾਥ ਜਿੰਨੀ ਸੱਚ ਨਾਲ ਲੱਦਿਆ ਨਾਨਕ ਸੇ ਸ਼ਾਬਾਸ਼ ਜਿੰਨੀ ਗੁਰਮਿਰ ਇੱਕ ਪਛਾਣਿਆ ਆ ਸਾਥ ਚੱਲਦੇ ਆ ਆਪਣੇ ਕੋਲ ਲੱਦਣ ਵਾਲਾ ਕੋਈ ਪੌਣ ਵੀ ਐ ਬੌਲਦ ਵੀ ਐ ਲੱਦਣ ਵਾਲਾ ਮੁੱਦ ਵੀ ਐ ਲੱਦਣ ਵਾਲਾ ਜਿਹਨੇ ਸੱਚ ਲੱਦ ਲਿਆ ਉਹ ਠੀਕ ਬਾਕੀ ਡੱਗੇ ਗਏ ਸਭ ਅੱਛਾ ਜੀ ਨਾ ਬੌਲਦ ਚੱਪਣ ਕੇ ਅੱਗੇ ਲਈਏ ਖੋਏ ਸਭ ਕੁਝ ਐ ਨਵੇਂ ਆ ਗੋਤੇ ਦੀ ਕਰਦੇ ਹੋ ਜਿਹੜਾ ਤੁਹਾਡੇ ਗਾਂ ਕੰਮ ਨਹੀਂ ਹੋਣਾ ਜਿਹੜੀ ਤੁਹਾਡੇ ਗਾਂ ਦਾ ਪਾਉਣ ਚੀਜ਼ ਹੋ ਲੋ ਕੋ ਆਰਪੰਦਾਂ ਦਾ ਕੋਈ ਨਹੀਂ ਦੀ ਦੀ ਸੀ ਉਹ ਤਾਂ ਹੁਣ ਗਏ ਛੇ ਗਏ ਵਿਚਾਰੇ ਜਿਹੜਾ ਨਾਮੇ ਨਾਵਲ ਤੇ ਆ ਸੀ ਉਹ ਕਹਿੰਦੇ ਭਾਈ ਤੁਸੀਂ ਦੇਖ ਲਓ ਸਾਡੇ ਕੋਲ ਜਿਹੜੀ ਬਾਹਰ ਗਾਂ ਕੰਮ ਹੋਵੇ ਚੀਜ਼ ਬਈ ਹੈ ਤੁਸੀਂ ਦੱਸ ਦੋ ਸਾਨੂੰ ਅਸੀਂ ਉਹ ਕਰ ਦਿੰਦੇ ਬਾਕੀ ਅਜੀਜ਼ਾ ਆਪਣੇ ਹਿਸਾਬ ਨਾਲ ਨਹੀਂ ਲੈਂਦੇ ਆ ਉਹ ਕਹਿੰਦੇ ਨੇ ਜੀ ਤੁਹਾਡੀ ਗੱਲ ਵੀ ਤੁਸੀਂ ਲੈ ਜਾਓ ਤੁਹਾਡੀ ਕੀ ਗੱਲ ਕਰਨ ਦੀ ਗੱਲ ਦੀ ਕਰਦੇ ਆ ਨਿਕਲ ਜਾਓ ਵੀ ਇਹ ਪੀ ਰਸਤੇ ਰਸਤੇ ਕਰਦੇ ਕੋ ਦੂਏ ਰਸਤੇ ਤਰਾਸੀ ਬੋਲਣਾ ਵਾਲੀ ਉਹਨਾਂ ਦੀ ਕੀਤੀ ਤੇ ਉਹਨਾਂ ਕੋਲੋਂ ਕੁਝ ਵੀ ਨਿਕਲਿਆ ਤਾਂ ਜਾਣ ਵਾਲਾ ਖਾਬੀਤੀ ਰਹਿ ਗਿਆ ਫਿਰ ਆਪਣੇ ਆਪ ਉੱਠ ਕੇ ਸਮਝਣ ਲੱਗੇ ਆਦਮੀ ਜਦਿਆਂ ਉਸ ਵੇਲੇ ਸਭੀ ਦਾ ਕਹਿਣਾ ਮਤਲਬ ਹੈ ਉਲਟਾ ਸਕੇ ਗਰੀ ਜਾਂਦਾ ਬਦਾਰਥ ਜਦ ਸੰਸਾਦ ਕੇਂਦਰ ਦਾ ਟਾਈਮ ਹੁੰਦਾ ਉਦੋਂ ਸਭੀ ਹੋਇਆ ਥਗਿਆ ਆਪਣੇ ਆਪ ਨੂੰ ਗਲਤ ਚੀਜ਼ਾਂ ਕਰਕੇ ਰਿਹਾ ਗਲਤ ਕੰਮ ਕਰਦਾ ਰਿਹਾ ਹੋਰ ਹੋਰ ਕੰਮ ਕਰਦਾ ਰਿਹਾ ਬਈ ਕਿਹਾ ਵੀ ਅਵਰ ਕਾਇਤਰੇ ਤੇ ਨਾ ਕਾਮ ਗੁਰਸਾਖ ਪਰੇ ਮੈਂ ਤਾਂ ਨਿਤਨੇ ਵੀ ਪੜਦਾ ਆਪਾਂ ਧਿਆਲੇ ਦੀ ਦਿੱਤਾ ਅਵਰ ਕਾਇ ਤਰੀਕੇ ਦੇ ਨਾਮ ਉਹ ਵੀ ਸਾਧ ਸੰਤ ਕਾ ਮਜੇ ਕੇਵਲ ਨਾਮ ਕਿਰਪਾ ਹੋਇਆ ਜੋ ਚੀਜ਼ ਉਹ ਖੋ ਲੈਣੀ ਮੁੱਠੜੇ ਸੇ ਸਾਥ ਜਿੰਨੀ ਸੱਚ ਨਾਲ ਲੱਦਿਆ ਨਾਨਕ ਸੇ ਸ਼ਾਬਾਸ਼ ਜਿੰਨੀ ਗੁਰਮਿਲ ਇੱਕ ਪਛਾਣਿਆ ਜਿਹਨੇ ਗੁਰੂ ਨਾਲ ਕੇ ਪਛਾਣ ਲਿਆ ਉਹ ਸ਼ਾਬਾਸ਼ ਆ ਉਹਨੇ ਵਿਦਿਆਰਥੀ ਵੀ ਕੁਝ ਵਧੀਆਗਾ ਬਦਲਾਅ ਕੀ ਦੀ ਉਹਨਾਂ ਨੇ ਦੇਈ ਨਹੀਂ ਕੁਝ ਉਹਨਾਂ ਦਾ ਪਛਾਣ ਲਈ ਜਿਹੜਾ ਤਬਦੀਲ ਆਤਮਦਰਸ਼ਨ ਕੀਤਾ ਉਹ ਤਾਂ ਬੰਦੇ ਜੀ ਦਾ ਖਾਲੀ ਇੱਤੇ ਜਾਣਾ ਬਸ ਇੱਥੋਂ ਠੀਕ ਹੈ ਜੀ ਖਾਲੇ ਮਤਲਬ ਤਾਂ ਇੱਧਰ ਕੁਝ ਹੈ ਨਹੀਂ ਜਿੱਦਾਂ ਨਹੀਂ ਜਾਣਾਲ ਤਾਂ ਸਭ ਸਾਡੇ ਮੁਤਲਬ ਦਾ ਹੈਗਾ ਜੋ ਸੌਦਾ ਕਰਨ ਚਾਹੀਦਾ ਗਾਨਪੀਰ ਸਾਹਿਬ ਦਾ ਪਹਿਲਾਂ ਪਾਲੇ ਪਾਸੇ ਹੈਗਾ ਹੀ ਹੈ ਇੱਧਰ ਤਾਂ ਸਾਡੇ ਖਾਬਤਾ ਠੀਕ ਹੈ ਜੀ ਇੱਕ ਪਛਾਣ ਇੱਕ ਪਛਾਣਿਆ ਬਾਰੇ ਦੱਸੋ ਵੀ ਕੌਣ ਹੈ ਜਿਹਨੂੰ ਪਛਾਣਨਾ ਆਪਣੇ ਆਪ ਨੂੰ ਪਛਾਣਨਾ ਹੋਰ ਕਿ ਨੂੰ ਪਛਾਣਨ। ਅੱਛਾ ਜੀ। ਆਪੇ ਕਹੋ। ਆਪੇ ਕਹਿ ਰਹੇ ਹੋ ਪਛਾਣਦੇ ਹੋ ਨੇ। ਆਪਣਾ ਆਪੇ ਪਛਾਣਨਾ ਇੱਕ ਦੂਆ ਦੇਖੋ। ਦੂਆ ਵੀ ਪਛਾਣਦੇ ਆ ਵੀ ਪਛਾਣਦੇ ਸਰੀਰ ਦੋ ਨੇ ਆਪਣੇ ਕੋ। ਅੱਛਾ ਜੀ। ਪਹਿਲੇ ਨੂੰ ਬੰਦਾ ਸਰੀਰ ਹੈ ਇੱਕ ਹੈ। ਇਹ ਦੂਏ ਨੂੰ ਬੰਦਾ ਸਰੀਰ ਹੈ ਬਾਹਰ ਇਹ ਦੂਆ ਇਹ ਦੂਜੇ ਪਾਏ ਬੇਗੁੱਚੀ ਪਈ ਤੋਂ ਜੀ ਗਣ ਰਿਆ ਸਭੀ ਲੋਕ ਦੋ ਰੁਪਏ ਦਾ ਫਰੀਦ ਹੈ ਦੋ ਰੁਪਏ ਦਾ ਹੀ ਇਹਦਾ ਮਾਲ ਹੈ ਦੋ ਰੁਪਏ ਦਾ ਹੀ ਹਿਸਾਬ ਹੈ ਦੋ ਰੁਪਏ ਦਾ ਹੀ ਕੰਮ ਕਰਦਾ ਹੈ ਇਹ ਦੋ ਰੁਪਏ ਦੀ ਹੁਣ ਸਾਰੀ ਠੀਕ ਹੈ ਤੇ ਗੁਰ ਦਾ ਭਾਵ ਕੀ ਲਾਵਾਂਗੇ ਚਿੱਤ ਲਾਵਾਂਗੇ ਇੱਥੇ ਗੁਰ ਮਿਲ ਇੱਕ ਪਛਾਣਿਆ ਗਿਆਨ ਬਿਲਕੁਲ ਕਿ ਕਦਾ ਤੇ ਉਹ ਜੀ ਆ ਗਿਆ ਜੀ ਕਿਤਨੋਂ ਮਿਲ ਕੇ ਇੱਕ ਪਛਾਣ ਜੋ ਆਪਾਂ ਅਫਖਰੀ ਕਿਆਨ ਤੇ ਆ ਪਛਾਣ ਲਿਆ ਅੱਖ ਖੁੱਲਦੀ ਅਸਲ ਦੇ ਕੌਣ ਕਿਹਦੇ ਨਾਲ ਮਿਲਿਆ ਪਰ ਇਹ ਨਹੀਂ ਕਰ ਸਕਦੇ ਕੌਣ ਕਿਹਦੇ ਨਾਲ ਮਿਲਿਆ ਹਾਂ ਇਸ ਸਵਾਲ ਦਾ ਜਵਾਬ ਤਾਂ ਜੱਥਕਵੀਰ ਕਹਿੰਦਾ ਕਵੀਰ ਸਖੀ ਜੀਵਨ ਕੀ ਵਸੇ ਤੀ ਕਿਹੜਾ ਕਿਹੜੇ ਚ ਬਸ ਜੀਓ ਪੀਓ ਸੂਝੇ ਤਰੀਕਾ ਤੇ ਘਟਵੇਂ ਜੀਓ ਪੀਓ ਇਹ ਨਹੀਂ ਪਤਾ ਪਾਣੀ ਦੁੱਧ ਜਨ ਲੈਕ ਤੋ ਪਾਣੀ ਚ ਲੈ ਲੈ ਕੁੱਤੀ ਕਾਹਨੇ ਦੁੱਧ ਚ ਆਪਾਂ ਲੈ ਪਾਣੀ ਢੋਲ ਤਾਂ ਕੌਣ ਕਿਹਦੇ ਚ ਲੈ ਇਹਦਾ ਜਵਾਬ ਦਿਆਂਗਾ ਤੇ ਕੋਈ ਨਹੀਂ ਵਾੜਾ ਉੱਠੀ ਜੀ ਪਾਣੀ ਦੀ ਭੇਗੀਦਲ ਉਹਦੇ ਪੱਛੀ ਦੀ ਲਹਿਰ ਤੇ ਜਿਹੜੇ ਪਾਣੀ ਚੋਂ ਲਹਿਰ ਪੈਦਾ ਹੋਈ ਸੀ ਉਸੇ ਦੇ ਵਿੱਚ ਡੇਗੀ ਗਈ ਗਈ ਨਾਲ ਕਲੀਰ ਪਰ ਉਹ ਉਹ ਬਿਜਿਓ ਜੋ ਪਾਣੀ ਸੰਗ ਪਾਣੀ ਦੇ ਧੋਏ ਤਾਂ ਜੇ ਹੈ ਹੀ ਪਾਣੀ ਤੇ ਕਿਹੜਾ ਉਹ ਤਾਂ ਸਵਾਲ ਉੱਠਦਾ ਜੇ ਪੰਚਲਵੰਦ ਦੋ ਨੌ ਰੱਖੇ ਨੀਰ ਦੇ ਦੂ ਦੂ ਰੱਖ ਲੈਣਾ ਡੱਡ ਸਵਾਲ ਉੱਠਿਆ ਇਹ ਗਈ ਨਾਨਕ ਸੇ ਸ਼ਾਬਾਸ਼ ਜਿੰਨ ਗੁਰਮੇਲ ਇੱਕ ਪਛਾਣਿਆ ਜਿੰਨ ਗੁਰਮੇਲ ਗਿਆਨ ਵੇਖ ਕੇ ਪਛਾਣਿਆ ਠੀਕ ਹੈ ਜੀ ਗੁਰਬਾਣੀ ਦੇ ਗਿਆਨ ਤੋਂ ਇੱਕ ਪਛਾਣ ਲਿਆ ਤਾਂ ਪਹਿਲਾਂ ਵੀ ਕਹ ਪਛਾਣਿਆ ਜੀ ਤੁਸੀਂ ਕੋਈ ਮੁੜ ਕੇ ਤੂੰ ਪਿਆਜ ਆ ਕੋ ਕਹਤਾ ਇਹਦਾ ਇੱਕ ਕਿਤੇ ਰਬ ਰੂਪ ਹੁੰਦਾ ਹੈ ਹੋਰ ਕੋਈ ਇੱਕ ਹੁੰਦਾ ਸੀ ਪਰ ਜਦ ਧਿਆਨ ਵੇਖਿਆ ਲੂ ਕੋਹਾਲਾ ਕਹਿੰਦਾ ਤੂੰ ਦੀ ਇੱਕ ਹੈ ਠੀਕ ਹੈ ਇਸ ਨੂੰ ਹੈ ਜਪਤੀ ਸਾਹਿਬ ਚ ਕਹਿੰਦੇ ਗੁਰਾ ਇੱਕ ਦੇ ਬੁਝਾਈ ਹਾਂ ਇਸ ਲੋਕ ਕਹਿੰਦੇ ਨੇ ਗੁਰਾ ਇੱਕ ਦੇ ਬੁਝਾਈ ਇੱਕ ਕੌਣ ਹੁਣ ਦਾਲ ਹੋ ਹੋਇਆ ਹਾਂਜੀ ਐਸ ਲੋਕ ਦਾਲ ਕਰਕੇ ਤੈਨੂੰ ਇੱਕ ਦੀ ਬਾਸ ਪੈਂਦਾ ਹੈ ਵੀ ਇਹ ਸ਼ਾਇਦ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਗੁਰਮੇਲ ਇੱਕ ਪਛਾਣਿਆ ਆਵਾ ਨਾ ਨਾ ਅਬ ਆਈ ਭਾਰਤ ਤੇ ਜਾਣੀ ਗੁਰਮਤਿ ਗੁਰਮਤਿ ਰੈਤ ਹੋਇਆ ਕੇ ਰਸ ਬਦਲ ਠੀਕ ਆਇ ਭੋਟ ਤੇ ਆਗੇ ਜੇ ਗੁਰਬਾਣੀ ਦਾ ਔਖੇ ਕੁਝ ਨਹੀਂ ਆਇ ਤੋਏ ਕਿਤੋ ਜੀ ਆ ਸਪਸ਼ਟ ਕਰਨਾ ਜ਼ਰੂਰੀ ਹੈ ਹਾਈ ਉਹ ਦੇਖਣਾ ਕੋਈ ਬਾਪ ਲਖਰੀ ਕੁ ਹੋਇਆ ਇਹਦਾ ਮਤਲਬ ਹੈ ਕੋਈ 4 ਵੇਲੇ ਕਿਰਪਲੇ ਖਾਸੀ ਤਾਂ ਕਹਿੰਦੇ ਨੇ ਕੋਈ ਕਰੇ ਵਿਝਾਈ ਇੱਕ ਵਾਰੇ ਇੱਕ ਵਾਰੇ ਹੁਣ ਵੀ ਭਲੇਖਾ ਭਲੇਖਾ ਇੱਕ ਵਾਰੇ ਰਹਿਣਾ ਤੇ ਵਿਸ਼ਾ ਜੇਲਾ ਭਲੇਖਾ ਇੱਕ ਵਾਰੇ ਰਹਿਣਾ ਇੱਕ ਦਾ ਭਲੇਖਾ ਭਗਤ ਚੱਕ ਥੋੜੇ ਜਿਹੇ ਏਰੀਏ ਦੇ ਵਿੱਚ ਲੋਕ ਸਮਝਦੇ ਨੇ ਬਹੁਤਿਆਰ ਬਾਰੇ ਵਰਗਾ ਸਮਝ ਨਹੀਂ ਆਉਂਦਾ ਇਹਨਾਂ ਨੂੰ ਵੀ ਸਮਝ ਆ ਗਈ ਵਿੱਚ ਮੰਨਦਾ ਨਹੀਂ ਦੋ ਆਦਮੀ ਮੈਂ ਮਰਨ ਨੂੰ ਵੇਖੀ ਬੜੀ ਮੰਦਾ। ਹੋਰ ਹੋਇ ਜਿੱਲਬੇ ਠੀਕ ਹੈ ਜੀ। ਪੌੜੀ ਜਿੱਥੇ ਬੈਸਣ ਸਾਧ ਜਨ ਸੋ ਥਾਨ ਸੁਹੰਦਾ ਕੋਈ ਸੇਵਨ ਸਮਰਥ ਆਪਣਾ ਬਿਨਸੈ ਸਭ ਜਨ ਬੈਠੇ ਥਾਨ ਸਭ ਤੋਂ ਸੋਹਣਾ ਉਹ ਬਹਾਵ ਦਾ ਵਹਿਦਾ ਹੀ ਨਹੀਂ ਕੂੜੇ ਕਰਕੜ ਕੇ ਹੋਰ ਨੇ ਹਿਰਦੇ ਚ ਸਾਹ ਹਿਰਦੇ ਨੇ ਸਾਹ ਦਾ ਜਨ ਨਾਲ ਜੁੜ ਇੱਕ ਹੁੰਦਾ ਠੀਕ ਹੈ ਸਤਿਗੁਰ ਦੀ ਗੱਲ ਹੋ ਗਈਆਂ ਜੀ ਸਤਿਗੁਰ ਦੀ ਗੱਲ ਹੋ ਗਈ ਠੀਕ ਹੋ ਕੇ ਦੋ ਭਾਈ ਦੇ ਸਲਾਫਾਈ ਹੋਈ ਐ ਇਕੱਠੇ ਹੋ ਕੇ ਹੋਏ ਨੇ ਮੁਤਾਬਕ ਸਾਹ ਤਾਂ ਬੈਠੇ ਰਹੋ ਦੇਖ ਕੇ ਨਹੀਂ ਤਾਂ ਤਲਵਾਰਾਂ ਕੀਤੀ ਰੱਖਦੇ ਨੇ ਕਦੂਏ ਤੇ ਜਿੱਤੇ ਸਾਹ ਜਾਨ ਬੜਾ ਉੱਤੇ ਬੜਾ ਹੁੰਦਾ ਅਬਰਕਿਆਨ ਦਾ ਤਾਹੀਓ ਤੇ ਸੋਖ ਹੁੰਦਾ ਸੋਨਾ ਵੀ ਤਾਹੀ ਲੱਗਦਾ ਕਿ ਨਹੀਂ ਲੱਗਦਾ ਉਹਦਾ ਵਿਆਹ ਦਾ ਵੀ ਹੋਵੇ ਕੁਝ ਬਣ ਜਾਂਦਾ ਜਿੱਤੇ ਕਦੇ ਸਹਿ ਜਾ ਆਗਿਆਆਂ ਨੂੰ ਆਸੀ ਪੀਣ ਵਾਲਿਆਂ ਨੂੰ ਵੇੜੀ ਜੇ ਤੁਸੀਂ ਕਰਕੇ ਆ। ਸੋ ਹੰਤਾ ਜਿਆਦਾ ਕੁਸ਼ੂਲਾਟ ਆਏ ਹੋਏ। ਸਾਡੇ ਆਲ ਦੇ ਵੇਲ ਮੁਲਾਪਤੀਆਂ ਗੱਲਾਂ, ਲਾਹਣ ਪ੍ਰੇਮ ਅਸੀਂ ਲੈ ਲਾਂ ਤੁਹਾਡੇ ਮੂਹਰੇ ਬੰਦੇ ਹੱਥ ਸਾਡੇ ਸਭ ਕੁਝ। ਸਾਡੀ ਮਿੱਤੇ ਆ ਦੀ ਖਲੂਦੋਦ। ਸਾਡਾ ਪਾਲੀ ਕੀ ਤਾਹਲੋਦੋ। ਉਹ ਤਾਂ ਸੋਨਾ ਹੋਇਆ ਕਰਕੇ ਉਹ ਉਹ ਆ ਜਿੱਦਿਆਪਰ ਵਿੱਚ ਇੱਕ ਪੈਰੋਂ ਤਾਂ ਸੰਤ ਠੀਕ ਹੈ ਜੀ ਉਹ ਇਹ ਸੇਵਨ ਸਮ੍ਰਿੱਥ ਆਪਣਾ ਬਿਨਸੈ ਸਭ ਮੰਦਾ ਉਹ ਦੇਵ ਗੁਗਨੱਥ ਆਪਣਾ ਉਹ ਸੇਵਾ ਵੀ ਨਹੀਂ ਕਰਦੇ ਵੀ ਸਾਜਨ ਦੇ ਸੇਵਾ ਵੀ ਕਰਨੀ ਮੰਦੀ ਹੈ ਸੁਭਰਤਾ ਆਪਣਾ ਜਿਹੜਾ ਆਪ ਤੋਂ ਸੁਭਰਤਾ ਹੈ ਸ਼ਬਦ ਗੁਰੂ ਗੁਰ ਤੋਂ ਤਾਂ ਸੁਭਰਤਾ ਨੂੰ ਸ਼ਬਦ ਗੁਰੂ ਹੀ ਆ ਸੁਭਰਤਾ ਆਪਣਾ ਪ੍ਰਿੰਸੈਸ ਆਫ ਮਨ ਗੁਰੂ ਜੀ ਜ਼ਬੂਦਾ ਗੁਰਦਪਾਵਨ ਦੇ ਰੇਡੀਓ ਦੀਵਾਨਾ ਦੇ ਵਿੱਚ ਗੁਰਦਪਾਵਨ ਨੇ ਕਹਾ ਸ਼ਬਦ ਗੁਰੂ ਜੋ ਕੋ ਭੌਂਦੇ ਜਾਵੇ ਕਿ ਹਾਂ ਗੱਦਾ ਰਹੀ ਜਾ ਰੋ ਕੋ ਆ ਰਿਹਾ ਸ਼ੁੱਧ ਆ ਨੇ ਜਗਣਾ ਉਹਨਾਂ ਨੂੰ ਮਿਲਣਾ ਕੋਤੇ ਮੰਦਰ ਤਾਂ ਕਿਵੇਂ ਆਜੂ ਉੱਚੇ ਤੋਂ ਪੇਰ ਆਉਣਾ ਚਾਹ ਲੈ ਫਿਰ ਹੀ ਆਵਣਾ ਹੈ ਉੱਤੇ ਤਾਂ ਉਹ ਇੱਕ ਕਨੀ ਸਵੇਰਾ ਕੇ ਦਿਵਿਾਈ ਜਉ ਥਲੇ ਹੋਈ ਜੇਤਾ ਇਹ ਠੀਕ ਹੈ ਜੀ ਸਮਰੱਥਕਰ ਇੱਥੇ ਸਿਹਾਰੀ ਲਾ ਕੇ ਲਿਖਿਆ ਵੈਸੇ ਸਮਰਿੱਥ ਆਪਾਂ ਨੂੰ ਬਹੁਤ ਦੇ ਅਖਰਾਂ ਤੇ ਨਹੀਂ ਦੇਣਾ ਚਾਹੀਦਾ ਠੀਕ ਹੈ ਜੀ ਆਪਣੇ ਕੋ ਜਿਹੜੇ ਅੱਖਰੀ ਰੋ ਉਹ ਸਾਡਾ ਜਿਹੜਾ ਫ੍ਰੇਮ ਇੱਕ ਅੱਛਾ ਜੀ ਫ੍ਰੇਮ ਤੋਂ ਕੇ ਨਹੀਂ ਚਾਹੀਦਾ ਬਿਸਪੀਡ ਹੋ ਰਿਹਾ ਹੈ ਠੀਕ ਹੈ ਜੀ ਬਤਿਤ ਉਧਾਰਨ ਪਾਰ ਬ੍ਰਹਮ ਸੰਤ ਵੇਦ ਕਹੰਦਾ ਭਗਤੀ ਵਸ਼ਲ ਤੇਰਾ ਬਿਰਧ ਜੁਗ ਜੁਗ ਵਰਤਨ ਦਾ ਜਿਹੜਾ ਪਾਰ ਬ੍ਰਹਮ ਉਹ ਜਿਹਨੂੰ ਕਹਿੰਦੇ ਨੇ ਨਾ ਮੇਰਾ ਉੱਪਰ ਅਫਸਰ ਹੈ ਅੱਛਾ ਉਹ ਪਾਰ ਬ੍ਰਹਮ ਇਹੋ ਕਿ ਅਸੀਂ ਸਮਝਾ ਤਾ ਅਸਲ ਦੀ ਪਰਬ ਅੱਛਾ ਪਰਬ ਰਬੂ ਕਿਹਾ ਸੀ ਕਿ ਨਾ ਫਿਰ ਨਾਲ ਵੀ ਕੋਈ ਹੋਰਾਂ ਦੇ ਵਿਦਵਾਨ ਹੋਣਾ ਬਣੇ ਪਰਬ ਕੱਲੂ ਭਗਤ ਬਿਸ਼ਾਲ ਕਹਾਂਦੇ ਪਰਬ ਜਿਹੜੇ ਭਗਤੀ ਕਰਦੇ ਉਹ ਸੱਚਾ ਕਰਦਾ ਹੈ ਪਰਬ ਸੁਣਨ ਹੋ ਗਿਆ ਤਾਂ ਮਰੇ ਰਾਮਕਾਰ ਤੋਂ ਫਰਡੇ ਨਾ ਭਾਈ। ਭਾਲ ਮੈਂ ਮਿਹਨਤ ਤੇਰੇ ਭਾਲ ਹੈ। ਇਹਨਾਂ ਦਾ ਰੱਖਾ। ਇਹਨਾਂ ਦਾ ਦਾ ਤਾਲਣ ਕੀ ਹੈ? ਆਪ ਦਾ ਨਤਾਲਣ ਆਪ ਨੂੰ ਆਪ ਤੋਂ ਸਾਜਣ ਨੂੰ ਜੀਵਨ ਦਾ ਤਾਲਣ ਹੈ। ਪਰ ਰੱਖਾ ਚੋਂ ਪਰਮਾਤਮਾ ਖੜਾ ਹੈ। ਸਾਉ ਗਿਆਨ ਖਾ ਗੱਲ ਸੰਤਾ ਤੋਂ ਪਾਈ ਹੈ ਬਾਹਰ ਬ੍ਰਹਮ ਦੇ। ਵੇਦਾ ਨੂੰ ਜਿਲੇਖ ਦਿੱਤੀ ਇਸ ਅਵਸਥਾ ਵਾਲੇ ਅਨਭਾਵ ਨਾਲ ਬ੍ਰਹਮਾਲ ਕੋ ਦੱਗਤੇ ਰਹੂ ਹੁੰਦੇ ਦੂਜੀ ਜਗੀ ਤਾ ਕਰਿਓ ਇਹਨਾਂ ਦੇ ਵਿਗਨ ਨਾ ਪਾਇਓ ਇਹਨਾਂ ਦੀ ਭਗਤੀ ਚ ਕਈ ਗੱਲਾਂ ਜੀਆਂ ਗਲਤੀਆਂ ਤੁਹਾਨੂੰ ਆਣੀਆਂ ਤੁਹਾਨੂੰ ਬੁਰੀਆਂ ਲੱਗਣਗੀਆਂ ਤੁਹਾਨੂੰ ਸਮਝਾਉਂਦੀਆਂ ਗੱਲਾਂ ਗੱਲ ਕਈ ਹੈ ਤੁਹਾਡੇ ਭਲੇ ਦੀ ਗੱਲਾਂ ਗੱਲ ਦੇ ਤੁਹਾਨੂੰ ਲੱਗਣਗੀਆਂ ਬੁਰੀਆਂ ਕਿ ਤੇਰੂ ਨਾ ਪਗਨਾ ਨਾ ਨੇ ਲੇਉਗਾ ਪਰਬ ਰਬੀ ਰੋਦੀ ਸਪੋਰਟ ਤੇੜਾ ਇਹ ਗੱਲ ਐ ਤਾ ਵੀ ਤੇ ਬੈਡਾ ਵਿੱਚ ਵੀ ਦਿੱਤੀ ਤੇ ਹਰ ਦੇ ਵੀ ਵੀ ਅਬ ਚਲੀ ਜਾਂਦਾ ਭਗਤੀ ਬਸ਼ਲ ਤੇਰਾ ਬਿਰਧ ਹੈ ਜੁਗੀ ਜੁਗ ਵਰਤਨ ਦਾ ਜਿਹਨ ਭਗਤੀ ਕਰਦੇ ਲੋਕ ਉਹਨਾਂ ਦੀ ਬਕਦੀ ਛੜੀ ਨਾਲ ਜਾਵੇ ਉਹਨਾਂ ਦੀ ਬਕਦੀ ਅਜਾਈ ਨਾਲ ਚਲੀ ਜਾਵੇ ਤੇ ਤੇਰੀ ਜ਼ਿੰਮੇਵਾਰੀ ਹੈ ਛਲ ਕਫੜ ਤੇ ਕੋਈ ਉਹਦੀ ਫਸਤੀ ਛੱਤਾਂ ਲਵੇ ਕੋਈ ਬਿਜਲੂ ਪਾ ਦੇ ਠੀਕ ਤੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਤੇਰੀ ਹੈ ਜੁਗ-ਜੁਗ ਤੋਂ ਲੈ ਕੇ ਇਹ ਜ਼ਿੰਮੇਵਾਰੀ ਹੈ ਤੇਰੀ ਜਰੂਰ ਤੋਂ ਹੋਰ ਕਿਹਦੇ ਜ਼ਿੰਮੇਵਾਰੀ ਦਿੱਤੀ ਹੋਰ ਕਿਹਦੇ ਕਰੋ ਸਾਡੀ ਕੀਤਾ ਕੋਈ ਅਰਜ਼ੀ ਕਰੇਵੇ ਉਹ ਜਿਹੜੇ ਜਾਇਕਾਂ ਜਿਵੇਂ ਹਾਂਜੀ ਇੱਕ ਜਿੰਦਗੀ ਪੰਨਾ ਕਾਲਾ ਕਿਤੇ ਦੀ ਥਾਲ ਕਮਾਈ ਜੋ ਕਾਲਾ ਕਾਲੇ ਕੋਈ ਕੋਈ ਕਰ ਰਿਹਾ ਹੈ ਚੰਦ ਵਿੱਚ ਆਨਦੀ ਛੱਪੀ ਜਿੰਨੀ ਵਿਆਹ ਤੋੜਦਾ ਤਾਂ ਕਾਲ ਕਮੇ ਦਾ ਰਾਹ ਨਹੀਂ ਵੜਦਾ ਜਿਵੇਂ ਮਾ bari ਆਪਣੇ ਜਸਤੇ ਰੱਖਦਾ ਆਪ ਦੇ ਨਾਨਕ ਜਾਚੈ ਏਕ ਨਾਮ ਮਨ ਤਨ ਪਾਵਨ ਦਾ ਨਾਨਕ ਦੀ ਜਿਹੜੀ ਭੁੱਖ ਹੈ ਅੰਤ ਤਾ ਮੁਕਤ ਹੈ ਇਹ ਗਿਆਨ ਆਤਮ ਗਿਆਨ ਇਹ ਮੰਗਦਾ ਹੈ ਬਾਕੀ ਦੁਨੀ ਦੇ ਗਿਆਨ ਕੋਰ ਬਹੁਤ ਥੋੜੀ ਗੁੰਦਾ ਬੋੜੇ ਲੋਕਾਂ ਦੇ ਕੋਲ ਉੱਦਲ ਨੇ ਪੈਸਾ ਕਮਾਉਣ ਵਾਲੇ ਨਾਲ ਵੀ ਬੀਰੋ ਗਦਾਣ ਘਾਟ ਕਦੇ ਕੰਮ ਨਹੀਂ ਹੋ ਤਾਫੀ ਲੋਕਾਂ ਦੇ ਕੰਮ ਨਹੀਂ ਇੱਥੇ ਆਨੰਦ ਨੇ ਜਾ ਕੇ ਘਰ ਬਣਾਉਣਾ ਪਤਾ ਧਨ ਬਤਾ ਆਨੰਦ ਨੇ ਉੱਥੇ ਉਦੋਂ ਦਾ ਕੋਈ ਇੱਥੇ ਕੋਈ ਕੀਮਤ ਠੀਕ ਹੈ